ਸ਼ਲੋਕ ਗੁਰੂ ਗੋਬਿੰਦ ਗੋਪਾਲ ਗੁਰ ਗੁਰ ਪੂਰਨ ਨਾਰਾਇਣ ਗੁਰ ਦਿਆਲ ਸਮਰੱਥ ਗੁਰ ਗੁਰ ਨਾਨਕ ਪਤਿਤ ਉਧਾਰਣ ਹੋਣ ਜੇ ਤੁਸੀਂ ਕਹਿੰਦੇ ਸੀ ਨਾ ਗੋਬਿੰਦ ਆਰ ਗੋਪਾਲ ਆਡਾ ਦੇਖੋ ਗੁਰਵਾ ਕੇ ਸਾਰਿਆਂ ਦੇ ਨਾਲ ਇੱਕੋ ਸਾਰੇ ਗੁਰਦੇਵ ਹੀ ਕੋ ਬਿੰਦ ਹੈ ਗੁਰਦੇਵ ਹੀ ਕੋ ਕਹਿ ਰਹਾ ਮੇਰਾ ਆਪਣਾ ਮੂਲ ਹੈ ਗੁਰਦੇਵ ਹੀ ਤੁੰਨ ਨਾ ਲੈਣਾ ਗੁਰਦੇਵ ਹੀ ਤੁੰਨ ਕਰਨ ਵਾਲਾ ਉਹੀ ਨਾ ਲੈਣਾ ਗਿਆਨ ਦਾ ਕਰਨ ਵਾਲੇ ਨੂੰ ਨਾ ਲੈਣਾ ਜੇਕਰ ਉਹੀ ਵਿਆਲ ਉਸੇ ਨੂੰ ਵਿਆਲ ਕਿਹਾ ਹੋਇਆ ਕੋਈ ਸਮਗਠ ਹੈ ਗੁਰ ਨਾਨਕ ਪਾਠ ਤੋਂ ਦਾਉਂ ਨਾ ਕਹਿੰਦਾ ਉਹੀ ਗੁਰ ਪਾਠ ਤੁਹਾਨੂੰ ਉਦਾਹਰਣ ਕਰਨ ਵਾਲਾ ਜੇ ਉਹਦੇ ਨਾਲ ਜੁੜ ਜਾਂਦਾ ਹੈ ਉਹਦਾ ਉਧਾਰ ਹੋ ਜਾਂਦਾ विदाए भावनी लेना ਵੀ ਗੁਰਨਾਨਕ ਵਾਸਤੇ ਇਹ ਗੱਲ ਕਹੀ ਗਈ ਹੈ ਨਾਨਕ ਪੰਜਵੇਂ ਪਾਤਸ਼ਾਹ ਇਹ ਗੱਲ ਕਹਿ ਰਹੇ ਹਨ ਜੀ ਤਾਂ ਪੰਜਵੇਂ ਪਾਤਸ਼ਾਹ ਕਹਿ ਰਹੇ ਕਿ ਗੁਰ ਜਿਹੜਾ ਉਪਰੋਂ ਗੁਰਦਿਆਲ ਸੀ ਜਿਹੜਾ ਗੁਰਸਮਰਤ ਸੀ ਉਹੀ ਪਤ ਜੁਦਾਰਨ ਵਾਸਤੇ ਕੋਈ ਗੁਰ ਠੀਕ ਹੈ ਜੀ ਨਾਨਕ ਤਾਂ ਇਹ ਗੱਲ ਵਿਰੜ ਰਹੇ ਠੀਕ ਹੈ ਜੀ ਪੌਜਲ ਬਖਮਸਗਾ ਗੁਰ ਬੋਇਥੈ ਤਾਰਿਯਮ ਨਾਨਕ ਪੂਰ ਕਰਮ ਸਤਗੁਰ ਚਰਣੀ ਲੱਗਿਆਂ ਆਹੇ ਪਾਵਲ ਵਿਖਮ ਹਸਗਾ ਜਿਹੜਾ ਪਾਵਲ ਹੈ ਵਿਖਮ ਨਹੀਂ ਕਰਿਆ ਜਾ ਆਦਮੀ ਤੇ ਆਪਣੀ ਸ਼ਕਤੀ ਨਾਲ ਪਾਰ ਜਾਂ ਨਹੀਂ ਪਾਰ ਕੀਤਾ ਜਾ ਸਕਦਾ ਜਿਹੜਾ ਗੁਰ ਹੈ ਉਹ ਬਹੁਤ ਹੈ ਉਹ ਜਹਾਜ਼ ਹੈ ਉਹ ਤੇ ਬਣਾ ਨਹੀਂ ਜਾ ਸਕਦਾ ਉਹਦੇ ਨਾਲ ਲੱਗ ਹੀ ਕਰਿਆ ਜਾ ਸਕਦਾ ਗੁਰ ਕੇ ਪਾਣੀ ਚ ਹੀ ਜਿਹੜਾ ਹੈਗਾ ਉਸਦੀ ਮਰਜ਼ੀ ਨਾਲ ਕਰਦੇ। ਕੋਪਵਜਲ ਤਾਰ ਕੀਤਾ ਗਿਆ। ਨਾਲਕ ਪੂਰੇ ਕਰਮ ਨਾਲ ਕਹਿੰਦੇ ਪੂਰੇ ਕਰਨ ਨੂੰ ਪੂਰੀ ਕਿਰਪਾ ਲੱਗਿਆ। ਜੇ ਸਤਗੁਰ ਚਾਣੀ ਪੂਰੀ ਕਿਰਪਾ ਹੋ ਜਾਂਦੀ ਹੈ। ਉਹਦੇ ਪੂਰੇ ਕਰਮ ਹੁੰਦੇ ਨੇ। ਤਾਂ ਇਹ ਸੰਭਵ ਹੈ ਪਵਜਲ ਕਰਮ। ਵਰਨਾ ਨਹੀਂ ਕਰਿਆ ਗਿਆ ਕਰ। ਠੀਕ ਹੈ ਜੀ। ਇੱਥੇ ਸਤਗੁਰ ਕਹਿੰਦਾ ਜੀ ਗੁਰ ਕੀ ਗੱਲ ਹੈ ਜੀ ਹਾਂ ਜੀ ਛੱਟਪੁਰ ਜਦੋਂ ਜਾਣ ਲੈਂਦਾ ਛੱਟਪੁਰ ਬਣ ਜਾਂਦਾ ਛੱਟਪੁਰ আর گور ਕੋਈ ਗੱਲ ਹੈ ਅਜਿਖ ਤੇ ਪੈ ਜੋਤ ਦੀ ਗੱਲ ਹੋ ਰਹੀ ਹੈ ਜੀ ਹਾਂ ਜੀ ਸੁਪਰੀ ਪੌੜੀ ਧੰਨ ਗੁਰਦੇਵ ਜਿਸ ਸੰਗੀ ਹਰ ਜਪੇ ਗੁਰ ਕਿਰਪਾ ਜਬ ਭਏ ਤਾਂ ਅਵਗਣ ਸਭ ਛਪੇ ਤੋ ਗੁਰੂ ਬਿਕਾਇਤਾ ਸਤਗੁਰ ਬਿਕਾਇਤਾ ਗੁਰਦੇਵ ਬਿਕਾਇਤਾ ਹਾਂਜੀ ਇੱਕੋ ਜਿਹਾ ਸਾਕੇ ਲਿਖਣਾ ਰਹੇ ਗੁਰਦੇਵ ਹੋ ਰਿਹਾ ਸਤਗੁਰ ਹੋ ਰਹਾ ਗੁਰ ਹੋ ਇਤਨੋ ਇਤਨਾ ਨਾਮਾਂ ਦਾ ਸੰਬੋਧਨ ਕੀਤਾ ਹੋਇਆ ਹਾਂਜੀ ਇਹ ਤਰਕ ਗੁਰਦੇਵ ਜਿਸ ਸੰਗਹ ਹਰਜਾ ਤੇ ਗੁਰਦੇਵ ਧੰਨਾ ਜੀ ਵੀ ਸੰਗਤ ਦੇ ਚ ਹਰਜਾ ਤੇ ਫਾਲੂਣ ਜਾਣੇ ਇੱਕ ਮਾਨ ਇੱਕ ਜਿਤ ਹੋਏ ਤੇ ਬਿਨ ਹਰਜਾ ਦੇ ਨਹੀਂ ਜਾ ਸਕਦਾ ਉਹ ਜਾਣਿਆ ਜਾਵੇ ਜੇ ਧਿਆਨ ਕੇ ਬਾਹਰ ਹੋਵੇ ਫਿਰ ਨਹੀਂ ਜਾਣਿਆ ਜਾ ਸਕਦਾ ਉੰਤਰ ਧਿਆਨ ਹੋਏ ਤਾਂ ਬੰਨ ਜਾਣੀ ਨਹੀਂ ਜਾ ਸਕਦਾ ਗੁਰੂ ਗੋਪਾਲ ਜਦ ਭਏ ਉਹਨਾਂ ਗੁਰਪ੍ਰੀਤਾਲ ਸਾਰੇ ਯੋਗ ਛਪ ਗਏ ਦੂਰ ਹੋ ਗਏ ਉਹ ਦਾ ਨਾਸ ਹੋ ਬ੍ਰਹਮ ਗੁਰਦੇਵ ਨੀਚੋਂ ਊਚ ਥਪੇ ਕਾਟ ਸਿਲਕ ਦੁਖ ਮਾਇਆ ਕਰ ਲੀਨੇ ਤੇ ਨੇ ਨੇ ਕੀ ਕੀਤਾ ਅਵਸਥਾ ਕਰਦਾ ਜਿਹੜਾ ਮਾਇਆ ਦੇ ਵਿੱਚ ਅਸਦਾ ਸੀ ਉਹਨੂੰ ਉੱਪਰ ਚੱਕਣ ਲੱਗਦਾ ਮਾਇਆ ਤੋਂ ਘਣ ਨਜ਼ਰ ਕਰਤੀ ਤੇ ਲੰਮੀ ਤੋਂ ਨਿਹਾਲੀਏ ਸਾਥ ਨਾਲ ਤਾਂ ਕੋਈ ਦ੍ਰਿਸ਼ਟੀ ਚਲੀਗੀ ਸੱਚਾ ਨਾਲ ਜੁੜ ਗਿਆ ਜਾ ਕੇ ਕਾਟ ਦੀ ਸਿਲਕ ਦੁਖ ਮਾਇਆ ਮਾਇਆ ਦੇ ਜਿਹੜੇ ਪਰਦਾ ਸੀ ਨਾ ਪਰਮ ਦਾ ਕੱਟੇ ਦਿੱਤਾ ਇਹ ਘਟਦਾ ਮਾਇਆ ਦੇ ਤਲੇਖੇ ਦੂਰ ਆਪਣੇ ਹੁਕਮ ਤੇ ਨਹੀਂ ਹੈ ਮਾਇਆ ਮਾਇਆ ਪਰਮેશਰ ਦੇ ਹੁਕਮ ਤੇ ਕਲ ਇਹਨੋਂ ਆਪ ਅਪਦ ਆਪਣੇ ਦਾਸ ਬਣਾ ਲੇ ਆਪਣੇ ਦਸੇ ਦਾਸ ਪਰ ਕਟਿਆ ਰਿਆ ਦਾਸ ਬਣ ਕੇ ਦਾਸ ਰੋੜ ਕੇ ਹੀ ਸਭ ਤੋਂ ਵੱਡੀ ਪਦਵੀ ਦਾਸ ਹੋਣਾ ਹੈ ਇਹ ਸਮਝ ਆ ਗਈ ਪਰਮੋ ਕੇ ਗੁਰੂ ਵਣ ਚ ਸਾਰੀ ਵੱਡੀ ਪਦਵੀ ਨਹੀਂ ਹੈ ਗੁਰੂ ਵਣ ਦਾ ਅਹੰਕਾਰ ਵੱਧਾ ਗੁਰੂ ਦਾ ਪਰਮੇਸ਼ਰ ਹੈ ਇਹ ਉੱਚੀ ਪਦਵੀ ਹੈ ਸਭ ਤੋਂ ਹਾਂਜੀ ਗੁਣ ਗਾਏ ਬੇਅੰਤ ਰਸਨਾ ਹਰ ਜਸਤੇ ਗੁਣ ਗਾਇ ਬਿਆਨ ਫਿਰ ਕਿੰਨੇ ਗੁਣ ਗਾਏ ਨੇ ਰਸ ਨੂੰ ਦੇਣਾ ਰਸ ਲੈ ਲੈ ਹਰੀ ਹਰੀ ਦਾ ਜਾਸ ਆ ਗੁਰਬਾਣੀ ਉਹ ਤੇ ਬਾਅਦ ਦੀ ਗੱਲ ਹੈ ਜਿਹੜਾ ਉਹਦਾ ਦਾਸ ਬਣਦਾ ਉਹ ਗੁਣ ਗਾਇਨ ਆ ਗੁਰਬਾਣੀ ਠੀਕ ਹੈ ਆ ਇੱਥੇ 19ਵੀਂ ਪੌਦੀ